बीरा बीरा कर रही वीर भए बैराई वीर चले कर अपने बहन बिरै जल जाई बीरा बीरा कर रही बस पहला गीता नु बीरा बीरा कर दी रही वीर भए बैराई बीड़े हो गया बगत हो गया है बेटा के तेरा बोल ਕਿਸੇ ਦਾ ਪੁੱਤ ਬਣ ਗਿਆ ਕਿਸੇ ਦਾ ਉੱਤਾ ਬਣ ਗਿਆ ਕਿਸੇ ਦਾ ਬਾਪ ਬਣ ਗਿਆ ਕਿਸੇ ਦਾ ਭਾਈ ਬਣ ਗਿਆ ਤਾਂ ਪੈਰਾਈ ਹੋ ਗਿਆ ਹੂੰ ਉਹਦਾ ਹੋ ਗਿਆ ਠੀਕ ਐਸਾ ਹੋ ਗਿਆ ਆਪਣੀ ਮਰਜ਼ੀ ਕਰਦਾ ਗਿਆ ਹੂੰ ਉਹਨਾਂ ਕੋਲ ਬੁਬਜ਼ਾਈ ਨਹੀਂ ਹੈ ਹਾਂਜੀ ਗੱਲ ਨਹੀਂ ਬੁਜ਼ਦਾ ਹੁਦੀਦੀ ਮਰਜ਼ੀ ਗੱਲ ਲਾ ਗਿਆ ਪੈਰਾਈ ਹੋ ਗਿਆ ਇਹ ਤਾਂ ਝੂਠ ਬਣ ਗਿਆ ਵੀਰ ਚੱਲੇ ਘਰ ਆਪਣੇ ਵੀਰ ਚੱਲੇ ਘਰ ਆਪਣੇ ਗਹਿਣ ਜਿਦਾ ਬੜਾ ਤਿਆ ਗਿਆ ਗਹਿਣ ਬਿਰਹ ਜਲ ਜਾਈਂ ਪ੍ਰਣ ਉਹਦੇ ਬਿਰਹ ਜਲ ਜਾਂਦੀ ਹੈ ਬੁੱਧੀ ਜਲ ਜਾਂਦੀ ਹੈ ਆਪਣੇ ਜੇਤੇ ਜੇ ਸਮਾਜ ਉਹ ਬੁੱਧੀ ਜਲ ਜਾਂਦੀ ਹੈ ਸਭ ਬੁੱਧੀ ਜਾਲੀਏ ਇੱਕ ਰਹਿ ਤੱਕ ਗਿਆ ਅੱਛਾ ਜੇ ਜਲ ਜਾਂਦੀ ਹੈ ਬਾਅਦ ਚ ਠੀਕ ਹੈ ਕਹਿਣ ਦਾ ਭਾਵ ਕੀ ਹੈ ਜੀ ਵੀ ਇਹਨੇ ਹੀ ਵਿਗਾੜਿਆ ਸੀ ਬੁੱਧੀ ਨੇ ਮਨ ਨੂੰ ਬੁੱਧੀ ਨੇ ਵਿਗਾੜਿਆ ਬੁੱਧੀ ਨੇ ਪਹਿਲਾਂ ਕੀਤਾ ਬੁੱਧੀ ਨੇ ਖੜਾ ਇਹਨੂੰ ਛੋੜ ਦੁੱਖ ਹੁੰਦਾ ਹਮ ਤੋਂ ਜ਼ਿਆਦਾ ਠੀਕ ਹੈ ਘਰ ਆਪਣੇ ਤਾਂ ਕੀ ਭਾਵ ਹੈ ਵੀ ਉਹ ਚਿੱਤ ਸਮਾ ਗਿਆ ਹਾਂ ਜੀ ਹਾਂ ਸੀ ਹਾਂਜੀ ਬਾਬਲ ਕਹਿ ਕਰ ਬੇਟੜੀ ਬਾਲੀ ਬਾਲੇ ਨਹੀਂ ਜੇ ਲੋੜ ਵਰ ਕਾਮਣੀ ਸਤਗੁਰ ਸੇਵਹ ਤੇ ਬਾਬਲ ਕਹਿ ਕਰ ਜਿੰਨੇ ਜਿੰਨੇ ਬੇਟੜੀ ਹੁੰਦੀ ਹੈ ਬਾਲੀ ਬਾਲੇ ਨਹੀਂ ਹੁੰਦੇ ਉਹ ਜਿੰਨ ਦਾ ਬੱਚਿਆਂ ਨਾਲ ਪਿਆਰ ਹੁੰਦਾ ਹੈ ਉਹ ਦਾ ਪਿਆਰ ਸੀ ਉਹ ਦੋ ਛੋਟੇ ਸੀ ਹਾਂ ਬਾਬਲ ਕਹਿ ਕਰ ਸੀ ਬਾਲੀ ਬਾਲਾ ਬਾਲਾ ਬਾਲੀ ਆਪ ਇਹ ਜੀ ਦੋ ਦੰਦ ਪਰ ਜੇ ਬਰ ਲੋੜੇ ਕਾਂਗੜੀ ਇਹ ਬਰਦੀ ਲੋੜ ਹੈ ਅੱਛਾ ਜੀ ਸਤ ਗੁਰੂ ਦੀ ਸੇਵਾ ਤੇ ਉਹ ਤੁਸ ਸਤ ਗੁਰੂ ਦੀ ਸੇਵਾ ਕਿੱਥੇ ਕਰਨੀ ਪਊਗੀ ਤੁਹਾਨੂੰ ਦੋ ਕੇ ਜੋੜੇ ਦਸੇ ਸਭਾਲ ਤਬ ਨਾਲ ਤੁਸ ਛੱਡਣੀ ਪਊਗੀ ਉਹ ਵਾਲੀ ਸਤ ਗੁਰੂ ਛੱਡਣੀ ਪਊਗੀ ਠੀਕ ਹੈ ਜੀ ਬੁੱਝਣੋ ਸਤਗੁਰ ਸਾਚ ਮਿਲੇ ਠਾਕੁਰ ਹੱਥ ਵਡਿਆਈਆਂ ਜੈ ਭਾਵੇਂ ਤੁਹਦੇ ਵੱਲੋ ਕੋਈ ਬੱਲਾ ਬੁੱਝਣ ਵਾਲਾ ਜਾਂਦੀ ਬੁੱਝਣੂ ਵੱਲੋ ਜਾਂਦੀ ਬੁੱਝਣੋ ਸਤਗੁਰ ਸਾਚ ਮਿਲੇ ਸਤਗੁਰ ਸਾਚ ਮਿਲੇ ਸਤਗੁਰ ਸਾਚ ਦੀ ਬਰਦਾ ਪੱਤ ਭੱਲੇ ਹੋਵੇ ਤਾਂ ਸਤਿਗੁਰੂ ਤੱਕ ਪਹੁੰਚਿਆ ਜਾ ਸਕਦਾ ਹੈ। ਤੱਕੇ ਬਿਨਾਂ ਸਤਿਗੁਰੂ ਤੱਕ ਪਹੁੰਚਿਆ ਨਹੀਂ ਜਾ ਸਕਦਾ। ਤੇ ਚਿਆਰਿਆਂ ਨੂੰ ਸਤਿਗੁਰੂ ਮਿਲਦਾ ਕੋੜਿਆਰ ਨੂੰ ਠਾਕੁਰ ਹੱਥ ਵਡਿਆਈਆਂ ਜੈ ਭਾਵੇ ਤੰਦੇ। ਸਤਿਗੁਰਾਂ ਤੋਂ ਬਿਲੇ ਜੈ ਭਾਵੇ ਤੰਦੇ। ਅੱਗੇ ਵਡਿਆਈਆਂ ਦੇ ਠਾਕੁਰ ਦੇ ਹੱਥ ਦੇ। ਇਹ ਨੂੰ ਨੂੰ ਦੇ ਜਿਹੜਾ ਉਹਦਾ ਪਾਸ ਕਰ ਦਿੰਦਾ ਜਿਹਨੂੰ ਪਾਸ ਕਰ ਦਦਦਾ ਉਹਦੇ ਨੂੰ ਹੂੰ ਹੂੰ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਘਰ ਵਾਸਾ ਹੋਏ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਹੂੰ ਹੂੰ ਗੁਰਬਾਣੀ ਸਾਹਿਬ ਕੋਈ ਗੁਰਮੁਖ ਹੋਵੇ ਬਾਣੀ ਨੂੰ ਗੁਰਮੁਖ ਕੋਈ ਵਿਚਾਰ ਨਹੀਂ ਸਕਦਾ ਵਿਦਵਾਨਾਂ ਨੇ ਇਸ ਵਿੱਚ ਬਣ ਲਈ ਵਿਚਾਰ ਦੀ ਗੱਲ ਹੋਈ ਕਹੀ ਗਈ ਕਿ ਤੇਬੀ ਅੱਛਾ ਜੀ ਵਿਦਵਾਨਾਂ ਦੀ ਪਾਸ਼ਾ ਹੋਰ ਹੈ ਗੁਰਗੁਰਾਂ ਦੀ ਪਾਸ਼ਾ ਹੋਰ ਹੈ ਇਹ ਗੁਰਮੁਖੀ ਪਾਸ਼ਾ ਦੀ ਬਾਣੀ ਹੈ ਗੁਰਮੁਖੀ ਪਾਸ਼ਾ ਚ ਲਿਖੀ ਹੋਈ ਹੈ ਗੁਰਮਖ ਦਾ ਵਿਰਾਗਾਰੀ ਦੁਨਿਆ ਰਹਿੰਦਾ ਹੁੰਦਾ ਹੈ ਅੱਛਾ ਜੀ ਜਾਣਦਾ ਹੁੰਦਾ ਹੈ ਵਿਦਵਾਨ ਸੰਸਾਰੀ ਆਦਮੀ ਹੁੰਦਾ ਸੰਸਾਰੀ ਬਾਸ਼ ਚੱਲਦਾ ਹੁੰਦਾ ਹੈ ਇਸ ਕਰਕੇ ਦੋਨ ਦਾ ਵੇਲੇ ਨਹੀਂ ਗੁਰਬਾਣੀ ਤੋਂ ਪੜ੍ਹ ਕੇ ਗੁਰਮੁਖ ਬਣ ਜਾਂਦਾ ਗੁਰਬਾਣੀ ਕੇ ਪਾਸ਼ਾ ਬਦਲ ਜਾਂਦੀ ਹੈ ਗੁਰਬਾਣੀ ਦੀ ਪਾਸ਼ਾ ਸਿਕਰੀ ਪੈਂਦੀ ਹੈ ਗੁਰਬਾਣੀ ਤੋਂ ਹੀ ਮਸਤਾਨ ਪੜ੍ਹਵਾਨ ਪਹਿਲਾਂ ਹੀ ਸਕੇ ਉਹਨੇ ਕੁਝ ਬੁਖੀ ਪਾਸ਼ਾ ਹੈ ਜੀ ਜੇ ਕੋ ਗੁਰਮੁਖ ਹੋਏ ਗੁਰਮੁਖੁਰਾ ਉਹਨੇ ਗੁਰੂ ਦੇ ਪਿੱਛੇ ਲੱਗਿਆ ਹੋਇਆ ਹੁੰਦਾ ਗੁਰਬਾਣੀ ਰੂਹੀ ਨੇ ਗੁਰੂ ਬਦੇ ਆ ਉਹ ਵਰਮਾ ਹੈ ਇਹ ਬਾਣੀ ਮਹਾਪੁਰਖ ਕੀ ਮਹਾਪੁਰਖ ਦੇ ਬਚਨ ਹੈ ਇੱਕ ਬਚਨ ਬਾਣੀ ਪਰਮੇਸ਼ਰ ਦੀ ਹੈ ਫਕਤਾ ਦੀ ਬਾਣੀ ਨਹੀਂ ਹੈ ਫਕਤਾ ਵੀ ਬੋਲੀ ਹੈ ਫਕਤਾ ਨੇ ਬੁਲਾਈ ਹੈ ਬੋਲੀ ਵੀ ਨਹੀਂ ਹੈ ਫਕਤਾ ਬੁਲਾਏ ਬੋਦੇ ਨੇ ਬੁਲਾਉਣ ਵਾਲਾ ਇੱਕ ਹੈ ਬਾਂਦੀ ਬੋਸਦੀ ਹੈ ਜੀ ਇਹਨੂੰ ਬੁਲਾਇਆ ਹੈ ਇਹ ਬਾਂਦੀ ਬੋਸਪੁਰ ਕੀ ਤੇਜ ਘਰ ਬਸਾ ਹੋਏ। ਇਹ ਮੇਜ ਤੋਂ ਕੀ ਭਾਵੇਂ ਜੀ। ਕਿਤੇ ਆਪਣੇ ਢਾਰੇ ਚ ਬਸਾ ਹੋ ਜਾਂਦਾ। ਜਿਵੇਂ ਆਪਾਂ ਦਸਮ ਦਵਾਰ ਤੋਂ ਅੱਗੇ ਜਿਹੜਾ ਜਗ੍ਹਾ ਹੈ ਜੀ। ਛਰਚਖੰਡ ਬਸਾ ਕਰ ਦਿੰਦੀ ਹੈ।